ਸ੍ਰੀ ਲੋਕ ਮਹੱਲਾ ਤੀਜਾ ਸੱਚਾ ਨਾਮ ਧਿਆਏ ਤੂੰ ਸਭੋ ਵਰਤਾਇ ਸੱਚ ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਈ ਸੱਚ ਸੱਚੇ ਨਾਮ ਦੇ ਵਿੱਚ ਧੰਨ ਰੱਖ ਤੂੰ ਕਿਉਂਕਿ ਸਾਰਾ ਸੱਚ ਦਾ ਹੀ ਵਰਤਾਰਾ ਹੈ ਇੱਥੇ ਦੁਖ ਕਿਸੇ ਵੀ ਕਿਸਮ ਦਾ ਦੁੱਖ ਹੋਰ ਭੁੱਖ ਨੇੜੇ ਨਹੀਂ ਆਸਲ ਵੀ ਕੋ ਹੁਕਮ ਜੋ ਬੂਝੇ ਨਾਨਕ ਨੇ ਜਿਹਨੇ ਹੁਕਮ ਬੂਝ ਲਿਆ ਸੋ ਫਲ ਪਾਏ ਸੱਚ ਉਸ ਅੱਜਰਾ ਫਲ ਪਾਜਦਾ ਉਹਨੂੰ ਦੀ ਸਮਝ ਆ ਜਾਂਦੀ ਉਹ ਕੋ ਸੱਚ ਹੁੰਦਾ ਹਾਂਜੀ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੂਝੇ ਸੱਚ ਨਾਨਕ ਹਰਕਾਰ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੈ ਕਚ ਨਿਕਚ ਕਥਨੀ ਬਦਨੀ ਕਰਦਾ ਫਿਰੇ بڑے بڑے ਪਰਵਚਨ ਕਰਦਾ ਫਿਰਦਾ ਜਗਾ ਜਗਾ ਬੜੀਓ ਬੜੀਆਂ ਕਹਾ ਕਹਾਣੀਆਂ ਸੁਣਾਉਂਦਾ ਫਿਰਦਾ بڑے بڑے ਚਮਟਿਆੜੇ ਸੰਤੇ ਹੀ ਕੁਛ ਦੀ ਸਚਾਈ ਨੂੰ ਪ੍ਰਗਟ ਨਹੀਂ ਕਰ ਰਹੇ ਲੋਕਾਂ ਦੇ ਸਾਹਮਣੇ 부ਝਿਆ ਨਹੀਂ ਜੇ 부ਝਿਆ ਹੁੰਦਾ ਤਾਂ ਪ੍ਰਗਟ ਕਰਦੇ ਝੂਠੀਆਂ ਕਹਾਣੀਆਂ ਸੁਣਾਈ ਜਾਂਦੇ ਨੇ ਜੇ 부ਝਿਆ ਤਾਂ ਸੁਣਾਉਣ ਜੇ 부ਝਿਆ ਤਾਂ ਦੱਸਣ ਹਾਂਜੀ ਨਾਣ ਘਰ ਦਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕੱਚ ਨਿਕੱਚ ਜਿਹਨੇ ਭਾਣਾ ਮੰਨ ਲਿਆ ਭਗਤ ਹੋ ਕੇ ਜਿਹਨੇ ਨਹੀਂ ਮੰਨਿਆ ਉਹ ਕੱਚ ਨਾ ਕੱਚਾ ਕੱਚੇ ਨੇ ਭਗਤ ਨਹੀਂ ਹਣ ਉਹ ਕੱਚੇ ਬਿੱਲੇ ਨੇ ਕੱਚੇ ਬਿੱਲੇ ਕਲਬ ਹੁੰਦਾ ਜਿਹਨਾਂ ਦਾ ਉਹ ਆਪਣੇ ਆਪ ਨੂੰ ਸੇ ਕਹਿੰਦੇ ਤੇ ਉਹ ਕਹਿੰਦਾ ਉਹ ਕੱਚੇ ਬਿੱਲਿਓ ਕੱਚੇ ਬਿੱਲੇ ਹੀ ਜਿਹੜੇ ਗੱਲਾਂ ਕਰਦੇ ਨੇ ਸਿੱਕੀ ਦੀਆਂ ਪਰ ਅਭੀ ਲਾ ਕੇ ਸਿੱਖੀ ਕੀ ਆ ਸੱਚੀ ਸਿੱਖੀ ਉਹਨਾਂ ਨੂੰ ਬਰਦਾਸ਼ਤ ਨਹੀਂ ਕੱਤੇ ਬੱਲਿਆਂ ਨੂੰ ਠੀਕ ਆ ਹਰਕਾ ਪਾਣਾ ਕੀ ਹੁੰਦਾ ਜੀ ਹਰਕਾ ਪਾਣਾ ਮੰਨੇ ਸੋ ਭਗਤ ਹੋਏ ਇਹ ਮੰਨ ਲਵੇ ਸਭ ਕੁਝ ਹਰ ਕਰਤਾ ਮੈਂ ਕੁਝ ਕਰ ਨਹੀਂ ਸਕਦਾ ਹਰਕਾ ਪਾਣਾ ਮੰਨ ਲਿਆ ਜਿਹੜਾ ਮੰਨਦਾ ਮੈਂ ਕੁਝ ਕਰ ਸਕਦਾ ਹਰਕਾ ਪਾਣਾ ਕਰ ਮੰਨਦਾ ਠੀਕ ਆ ਉਹ ਹੈ ਕੱਚੇ ਨੇ ਕੱਚੇ ਹਾਂ ਕੱਚੇ ਨੇ ਕੱਚੇ ਬੱਲੇ ਨੇ ਜਿਨ੍ਹਾਂ ਨੂੰ ਹਾਂ ਜੀ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਕੋਈ ਥਾਉ ਕਥਾਉ ਨਾ ਜਾਣਨੀ ਉਹਨਾਂ ਅੰਦਰ ਲੋਭ ਵਿਕਾਰ ਮਨਮੁਖ ਬੋਲਣਾ ਜਾਣਨੀ ਅਰਮੁਖਤਾ ਬੋਲ ਜਿਹੜੇ ਬੋਲ ਨੇ ਨਿਗਰਬਾਨੀ ਦੀ ਭਾਸ਼ਾ ਇਹ ਹੀ ਨਹੀਂ ਜਾਣਦਾ ਸਮਝਦਾ ਇਹਦੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਕਾਮ ਕ੍ਰੋਧ ਅਹੰਕਾਰ ਉਹਨਾਂ ਦੇ ਅੰਦਰ ਓਏ ਬੋਲੀ ਭਾਸ਼ਾ ਹੀ ਨਹੀਂ ਜਾਣਦੇ ਓਏ ਨਾ ਜਾਣੀ ਥਾਂ ਕੋ ਤੋਂ ਦਾ ਨਹੀਂ ਉਹਨਾਂ ਨੂੰ ਗਿਆਨ ਹੈ। ਉਹ ਅੰਤਰ ਲੋਭ ਵਿਕਾਰ ਕੋ ਲੋਭ ਨਿਜ ਕਰ ਗਈ ਮਾਰੇ ਜਮ ਜੰਦਾਰ ਅੱਗੇ ਦਰਗਾ ਲਿਖੇ ਮੰਗੀਏ ਮਾਰ ਖਵਾਰ ਇਹ ਚ ਹੈ ਕੂੜਿਆ ਔਰ ਆਪਣੇ ਸਵਾਰ ਹੈ ਆਏ ਬੈਠ ਲੰਗ ਰਹੇ ਬਾਈ ਜੰਮਨਸਟੇਟ ਆਫ ਪ੍ਰੈਜ਼ੀਡੈਂਟ ਗੱਲਾਂ ਕਰਦੇ ਨੇ ਆਪਣੇ ਅਸੀਂ ਸ਼ਰਾਵਣ ਅਸੀਂ ਉੱਥੇ ਵਿਆਹ ਕਰਦੇ ਨੇ ਇੰਨੀਆਂ ਲੜਕੀਆਂ ਦੇ ਉਹ ਪੈਸੇ ਤੇ ਉਹ ਖਰਚਾ ਹੋਊ ਆਏ ਗੱਲਾਂ ਕਰਨ ਲੱਗੇ ਆਪਣੇ ਸਵਾਰ ਸਦੀਆਂ ਗੱਲਾਂ ਕਰਦੇ ਨੇ ਕਰਨ ਉਹਨਾਂ ਮਾਰੇ ਜਮ ਜੰਦਾਰ ਐਸੇ ਲੋਕਾਂ ਨੂੰ ਜਮ ਜੰਦਾਰ ਨੇ ਮਾਰਨਾ ਬੁਰੀ ਤਰ੍ਹਾਂ ਮਾਰਨਾ ਇਹਨਾਂ ਤੇ ਬੁਰੀ ਮਾਰ ਪੈਣੀ ਜਿਹੜੇ ਸਵਾਸ ਦੀਆਂ ਗੱਲਾਂ ਕਰਦੇ ਨੇ ਧਰਮ ਦੇ ਨੋਤੇ ਹਾਂਜੀ ਅੱਗੇ ਦਰਗਾ ਲਿਖੇ ਮੰਗੀਏ ਮਾਰ ਖਵਾਰ ਕੀਚੇ ਕੂੜਿਆਰ ਇਹ ਕੂੜਿਆਰਾਂ ਨੂੰ ਮਾਰ ਮਾਰ ਕੇ ਖਵਾਰ ਕਰਨਾ ਅੱਗੇ ਜੇ ਦਰਗਾ ਦੇ ਲੇਖਾਂ ਨੂੰ ਕਹਿੰਦਾ ਵੀ ਦਸੋ ਪੈਸੇ ਤੁਸੀਂ ਲਾਏ ਕਿੱਥੇ ਸੀ ਔਰ ਤੁਸੀਂ ਜਿਹਨੇ ਕਰਦੇ ਹੋ ਉਹ ਕਿਤੇ ਜਾਣਦਾ ਨਹੀਂ ਫੇ ਥੋੜਾ ਠੇਕਾ ਲਿਆ ਆ ਸੀ ਤੁਸੀਂ ਆਪਣਾ ਆਪ ਤਾਂ ਸਵਾਰਿਆ ਨੀ ਠੀਕ ਹੈ ਜੋ ਕੰਮ ਕਰਨਾ ਹੈ ਉਹ ਤਾਂ ਕੀਤਾ ਨਹੀਂ ਇਹਦਾ ਪਰਮੇਸ਼ਰ ਦਾ ਡਿਊਟੀ ਸੀ ਉਹ ਕਰਦਾ ਕਰਦਾ ਤੁਸੀਂ ਵਿਜਰਸ ਚਲਾਇਆ ਹੈ ਧੋਖਾ ਦੇ ਕੇ ਲੋਕਾਂ ਨੂੰ ਉਹਦਾ ਘਟ ਘਟ ਕੇ ਕੀ ਜਾਣਦਾ ਇਹ ਕੂੜਾ ਕੀ ਮਲ ਕਿਉਂ ਉਤਰ ਹੈ ਕੋਈ ਕੱਢੋ ਇਹ ਵਿਚਾਰ ਸਤਿਗੁਰ ਮਿਲੈ ਤਾਂ ਨਾਮ ਦਰੜਾਏ ਸਭ ਕੇ ਕਟਣ ਹਾਲ ਇਹ ਕੂੜੇ ਕੀ ਮਲ ਕਿਉਂ ਉਤਰ ਆ ਜਿਹੜਾ ਇਹ ਖੂੜਕਬਾਰ ਇਹ ਖਾਂਦੇ ਨੇ ਨਾ ਲੋਕ ਝੂਠ ਬੋਲ ਬੋਲ ਕੇ ਇਹਨਾਂ ਦੇ ਅੰਦਰੋਂ ਮਾਰ ਇਹ ਕੋਈ ਕੱਢੋ ਇਹ ਵਿਚਾਰ ਕੋਈ ਵਿਚਾਰ ਕਰਕੇ ਕੱਢੋ ਉਹ ਵਿਚਾਰ ਕਰੋ ਕਿ ਨਿਕਲੂ ਇਹਨਾਂ ਦੇ ਅੰਦਰੋਂ ਕੱਢ ਦਿਓ ਮੈਂ ਨਹੀਂ ਡੁੱਬ ਜਾਣਗੇ ਸਾਰੇ ਸਿੱਖੀ ਨੂੰ ਲੈ ਕੇ ਆਪ ਤਾਂ ਡੁੱਬੇ ਨੇ ਹੋਰਾਂ ਨੂੰ ਵੀ ਲੈ ਕੇ ਡੁੱਬਦੇ ਨੇ ਸਤਗੁਰ ਮੇਰੇ ਤਾਂ ਸੁਣਾਉਂਦੇ ਲਾਏ ਕੋਈ ਸਤਗੁਰ ਮੇਰੇ ਤਾਂ ਇਹਨਾਂ ਨੂੰ ਨਾਮ ਦਿਲਾਏ ਦਰਾਵੇ ਨਾਮ ਬਾਰੇ ਦੱਸੇ ਸਭ ਕਿਲਵੇ ਕੱਟਣ ਹਾਰ ਜਿਹੜਾ ਸਾਰੇ ਕਿਲਵੇ ਕੱਟ ਦਿੰਦਾ ਨਾਮ ਉਹ ਨਾਮ ਦੱਸੇ ਇਹਨਾਂ ਨੂੰ ਤਾਂ ਭਾਵੇਂ ਛੱਡਣ ਬੰਦਾ ਛੱਡਣ ਵਾਲੇ ਨਹੀਂ ਹਣ ਇਹ ਨਹੀਂ ਛੱਡਣ ਵਾਲੇ ਕੋਈ ਕਾਰ ਸੇਵਾ ਦੇ ਉੱਤੇ ਕੋਈ ਕਾਰ ਸੇ ਪਰ ਪੰਛੀ ਲੋਕ ਨੇ ਪਰ ਪੰਛ ਬਣਾਉਂਦੇ ਨੇ ਕੋਈ ਤਿੰਨ ਸਾਲਾ ਮੰਨ ਵਾਲੇ ਨੇ ਕੋਈ ਪੰਜ ਸਾਲਾ ਬਣਾ ਲੈਂਦਾ ਸਭ ਪਰਪੰਛ ਨੇ ਇਹਨਾਂ ਦੇ ਹਾਂਜੀ ਨਾਮ ਜਪੇ ਨਾਮੋ ਅਰਾਧੇ ਇਸ ਜਨ ਕੋ ਕਰੋ ਸਭ ਨਮਸਕਾਰ ਮਲ ਕੂੜੀ ਨਾਮ ਉਤਾਰੀਐ ਜਪ ਨਾਮ ਹੋਆ ਸਚਿਆਰ ਨਾ ਉਹ ਨੂੰ ਹੀ ਸਮਝੋ ਨਾਮ ਦੀ ਹੀ ਭੁੱਖ ਪੈਦਾ ਕਰੋ ਆਰਾਧਨਾ ਕਰੋ ਹਰ ਵਕਤ ਨਾਮੇ ਮੰਗੋ ਸਮਝਦੇ ਰਹੋ ਨਾਮ ਦੀ ਹੀ ਭੁੱਖ ਰਖੋ ਅੰਦਰ ਹਰ ਵਕਤ ਨਾਮੇ ਮੰਨਦੇ ਰਹੋ ਆਨ ਕਦੀ ਜੇ ਨਾਮ ਕਰੋ ਸਭ ਨਮਸਕਾਰ ਜਿਹੜਾ ਐਸਾ ਜਨ ਹੈ ਨਾਮ ਨੂੰ ਰਾਜ ਦਾ ਨਾਮ ਹੀ ਜਪਦਾ ਐਸੇ ਜਨ ਨੂੰ ਨਮਸਕਾਰ ਕਰੋ ਸਾਰੇ ਮਿਲ ਕੇ ਸਖੋ ਉਹ ਸਖੋ ਕਰੋ ਸਾਡਾ ਨਮਸਕਾਰ ਮਾਲਕ ਕੂੜੀ ਨਾਮ ਉਤਾਰਿਆ ਨਾ ਨਾਮ ਉਹ ਕੂੜ ਦੀ ਮਹਿੜ ਜਿਹਨੇ ਜਪ ਕੇ ਨਾਮ ਨੂੰ ਉਤਾਰ ਲਈ ਜਿਹਨੇ ਨਾਮ ਨਾਲ ਉਰ ਦੇ ਮੈਲ ਉਤਾਲ ਲਈ ਆਪਣੇ ਅੰਦਰੋਂ ਲੋਭ ਦੀ ਮੈਲ ਉਤਾਲ ਲਈ بس ਉਹ ਕੀਆ ਉਹ ਨਾਮ ਨਾਲ ਸਚਿਆਰਾ ਹੋ ਗਿਆ ਜਦ ਨਾਮ ਹੋਆ ਉਹੀ ਆਦਮੀ ਨਾਮ ਜਦ ਕੇ ਸਚਿਆਰਾ ਹੋਇਆ ਬਾਕੀ ਨਾਮ ਜਪਣ ਵਾਲੇ ਸਾਰੇ ਬਲੈਕਮੇਲਰ ਨੇ ਨਾਮ ਜਪਦੇ ਨੇ ਮੰਗਦੇ ਨੇ ਫੇਰ ਵੀ ਮਾਇਆ ਦੇ ਚਾਹੇ ਉਹ ਕਾਰਸੇ ਵਾਲੇ ਨੇ ਚਾਹੇ ਕੁਛ ਨੇ ਨਾਮ ਤਾਂ ਨਗਦੇ ਹੀ ਨਹੀਂ ਨਾਮ ਤਾਂ ਜਪਦੇ ਨੇ ਮੰਗਦੇ ਨਹੀਂ ਹਣ ਮੇਰਾ ਨਾਮ ਦਾ ਦਰਗਾਹ ਤੋਂ ਗੱਲ ਨਾ ਜਪਿਆ ਉਹ ਨਹੀਂ ਜਾਣਾ ਇਹ ਜਪਣਾ ਵੀ ਨਹੀਂ ਹੈ ਉਹਨਾਂ ਦਾ ਗਲਤ ਹੈ ਜਪਣਾ ਵੀ ਜਿਹੜਾ ਨਾਮ ਜਪਦੇ ਨੇ ਉਹ ਵੀ ਗਲਤ ਹੈ ਇਹ ਹੈ ਫਿਰ ਉਹਨਾਂ ਦਾ ਸਾਰੇ ਪਤਾ ਹੀ ਨਹੀਂ ਨਾਮ ਹੈ ਕਿ ਜਪਣਗੇ ਉਹ ਤਾਂ ਰੱਟਦੇ ਆ ਇੱਕ ਅੱਖਰ ਨੂੰ ਲੈ ਕੇ ਉਹਨਾਂ ਨੇ ਨਾਮ ਤੇ ਕੀ ਲੈਣਾ ਉਹਨਾਂ ਨੂੰ ਤਾਂ ਮਾਇਆ ਚਾਹੀਦੀ ਹੈ ਜਿਹੜਾ ਉਹਨਾਂ ਦਾ ਟਾਰਗੇਟ ਪੂਰਾ ਨਾ ਉਹਨਾਂ ਨੇ ਨਾਮ ਤੇ ਕੁਝ ਲੈਣਾ ਨਾ ਜਪਣ ਤੇ ਲੈਣਾ ਨਾ ਉਹਨਾਂ ਨੇ ਦਰਗਾਹ ਤੇ ਲੈਣਾ ਉਹਨਾਂ ਨੇ ਜੋ ਲੈਣਾ ਉਹਨਾਂ ਨੂੰ ਮਿਲਦਾ ਹੈ ਉਹ ਤਾਂ ਪੁੱਛਣ ਸੁਣਨ ਤਾਂ ਇਹ ਉਹਨਾਂ ਨੇ ਨਾਮ ਬਰਾਲੋ ਉਹਨਾਂ ਦਾ ਕੋਈ ਮਤਲਬ ਹੋਵੇ ਉਹਨਾਂ ਦਾ ਗੱਡਾ ਖੜਾ ਹੋਵੇ ਨਾਮ ਕਰਕੇ ਗੱਡਾ ਤਾਂ ਉਹਨਾਂ ਦਾ ਰੋਟੀਆਂ ਖਾਤਰਿਆ ਪੈਸੇ ਖਾਤਰ ਘਰ ਦਾ ਉਹ ਉਹਨਾਂ ਦਾ ਖਰਨ ਦਿੰਦੇ ਹੀ ਨਹੀਂ ਉਹ ਟੈਕਨਿਕ ਹੋ ਪਖੰਡ ਰੱਖਿਆ ਉਹਨਾਂ ਨੇ ਨਾਲ ਝੋਖਾ ਦੇਣ ਲੋਕਾਂ ਨੂੰ ਕੋਈ ਚੀਜ਼ ਇਸ ਦਾ ਮਤਲਬ ਪਹਿਲਾਂ ਨਾਮ ਜਪਣਾ ਉਸ ਤੋਂ ਬਾਅਦ ਆਰਾਧਨ ਜੀ ਨਾਮ ਜਪੇ ਨਾਮੋ ਆਰਾਧ ਜਪੇ ਤੇ ਬਿਨਾ ਆਰਾਧੇ ਨਹੀਂ ਜਾਣਾ ਠੀਕ ਹੈ ਜਪਣ ਨਾਲ ਦੋ ਪਦਾਰਥ ਮਿਲਦੇ ਆਂ ਜੀ ਜਪਣ ਨਾਲ ਸਮਝ ਆਉਂਦੀ ਹੈ ਨਾ ਹੁੰਦਾ ਕੀ ਹੈ ਪਹਿਲਾ ਨਾਮ ਹੁੰਦਾ ਕੀ ਹੈ ਸਮਝਣਾ ਕਿ ਜਪ ਲੈਣ ਦੇ ਬੇਧੋਪਦਾਰ ਤੇ ਮਿਲ ਜਾਂਦੇ ਨੇ ਫਿਰ ਹਰ ਅਦਨ ਅਰ ਨਾਲ ਦੀ ਨਾਲ ਪਹਿਲਾ ਨਾਮ ਹੋਰ ਮਿਲੇ ਗਿਆਨ ਹੋਰ ਮਿਲੇ ਗਿਆਨ ਹੋਰ ਮਿਲੇ ਗਿਆਨ ਹੋਰ ਮਿਲੇ ਭਾਵ ਹੈਗਾ ਵੀ ਗਿਆਨ ਲੈਣਾ ਹੈ ਹਾਂ ਪ੍ਰਾਪਤ ਕਰਨਾ ਪ੍ਰਾਪਤ ਕਰਨਾ ਆਪਣੀ ਜੋਤ ਦਾ ਗਿਆਨ ਲੈਣਾ ਆਪਣੇ ਨਿਰাকার ਸਰੀਰ ਦਾ ਗਿਆਨ ਲੈਣਾ ਆਤਮ ਗਿਆਨ ਲੈਣਾ ਹੈ ਦਾ ਗਿਆਨ ਲੈਣਾ ਆਪ ਹੀ ਨਿਰাকার ਹੈ ਹਾਂ ਮਲ ਕੂੜੀ ਨਾਮ ਉਤਾਰੀਐ ਜਪ ਨਾਮ ਹੋਇ ਸਚਿਆਰ ਹਾਂਜੀ ਜਨ ਨਾਨਕ ਜਿਸ ਦੇ ਇਹ ਚਲਤ ਸੋ ਜੀਵੋ ਦੇਵਨ ਹਾਰ ਜਨਾਨਕ ਕਹਿੰਦੇ ਨੇ ਜਿਹੜੇ ਇਹ ਕਰਤੱਬ ਨੇ ਚਲਤ ਨੇ ਨਾ ਜਿਹੜਾ ਐਸਾ ਜਿਹੜਾ ਤਲਵਾਰ ਵਾਲਾ ਆਦਮੀ ਹੈ ਸਚਿਆਰਾ ਹੁੰਦਾ ਹੈ ਜਪ ਕੇ ਨਾਮ ਸੋ ਜੀਵੋ ਦੇਵਨ ਹਾਰ ਉਹ ਜੀਵਨ ਦਾ ਦੇਣ ਵਾਲਾ ਹੁੰਦਾ ਹੈ ਜੀਵਨ ਨੂੰ ਕੁਝ ਦੇਣ ਵਾਲਾ ਹੁੰਦਾ ਉਹ ਕੁਝ ਦੇ ਸਕਦਾ ਹੈ ਘਰ ਖਾਇਕ ਥੱਥੋਂ ਦੇ ਦੇਣ ਦੀ ਸਮਰੱਥਾ ਹਾਂਜੀ ਪੌੜੀ ਤੂੰ ਤੇ ਦਾਤਾ ਨਹੀਂ ਕਿਸ ਆਖ ਸੁਣਾਈਏ ਗੁਰਪ੍ਰਸਾਦੀ ਪਾਏ ਜਿੱਥੋਂ ਹਉਮੈ ਜਾਈਏ اے ਤੇਰੇ ਵਰ ਵੱਡਾ ਦਾਤਾ ਤਾਂ ਕੋਈ ਹੈ ਨਹੀਂ ਕਿਰੋਂ ਇਹ ਗੱਲ ਤਸੀਹੇ ਜਾ ਕੇ ਗੁਰ ਪ੍ਰਸਾਦ ਦੀ ਪਾਏ ਪਹਿਲਾਂ ਗਿਆਨ ਹੋਵੇ ਗਿਆਨ ਦਾ ਪ੍ਰਸਾਦ ਕਿਸ ਨੂੰ ਮਿਲ ਜਵੇ ਗੁਰ ਦੀ ਪਾਏ ਜਿੱਤੋਂ ਹੋਂਮੇ ਜਾਈਏ ਤਾਂ ਕਿਤੇ ਹੋਂਮੇ ਛੁੱਟੇ ਪਹਿਲਾਂ ਪਹਿਲਾਂ ਗਿਆਨ ਮਿਲੇ ਤਾਂ ਹੋਂਮੇ ਛੁੱਟੇ ਛੁੱਟਣ ਦਾ ਵਿਭਿਦੀ ਮਿਲੇ ਫਿਰ ਹੋਂਮੇ ਛੁੱਟੇ ਹੋਂਮੇ ਨਹੀਂ ਛੁੱਟਦੀ ਗਾਹ ਕਿਵੇਂ ਚਲੀਏ ਹਾਂਜੀ ਮਰਸ ਸਾਦਾ ਬਾਹਰਾ ਸੱਚੀ ਵਡਿਆਈ ਹੈ ਜਿਸ ਨੂੰ ਬਖਸ਼ੇ ਤਿਸ ਦੇ ਆਪ ਲੈ ਮਿਲਾਈਏ ਰਸਕਸ ਸਾਡਾ ਬਾਹਰ ਆ ਜਿਹੜੇ ਰਸਕਸ ਨੇ ਇਹਨਾਂ ਤੋਂ ਬਾਹਰ ਆਤਮ ਕੀ ਦਰਸ਼ੀ ਹੈ ਸੰਸਾਰੀ ਰਸਕਸਾਂ ਜਿਹੜਾ ਲੋ ਫਸਦਾ ਉਹ ਰਸ ਬਿਨਾਂ ਕਿਸੇ ਰਸਕਸ ਨੂੰ ਚੰਗਾ ਬਾਹਰ ਆ ਸੱਚੀ ਵਡਿਆਈ ਹੈ ਸੱਚੀ ਵਡਿਆਈ ਦਾ ਤਾਂ ਸੱਚੀ ਵਡਿਆਈ ਦਾ ਉਹਨੂੰ ਰਸ ਹੈ ਪਰ ਆਏ ਰਸ ਜਿਹੜੇ ਕਾਸ ਨੇ ਸੰਸਾਰੀ ਬਸਤਾਂ ਦੇ ਇਹ ਨਹੀਂ ਓ ਰਸਾਂ ਹੀ ਫਸਿਆ ਹੋਇਆ ਜੀ ਬੜੀਆਈ ਚੋਂ ਰਸ ਆਉਂਦਾ ਇਹ ਨੇ ਕੱਟ ਲਿਆ ਰਸ ਦਾ ਸਵਾਦਾਂ ਬਾਹਰ ਆਉਣਾ ਸਵਾਦਾਂ ਬਾਹਰ ਠੀਕ ਹੈ ਸੱਚੀ ਵੜਿਆਈ ਹੈ ਸੱਚੀ ਵੜਿਆਈ ਸਵਾਦਾਂ ਦੇ ਬਾਹਰ ਰਸ ਬਖਸ਼ੇ ਜਿਸ ਦੇ ਆਪ ਲੈ ਮਲਈ ਹੈ ਠੀਕ ਹੈ ਅੰਦਰ ਅੰਮ੍ਰਿਤ ਰੱਖਿਓ ਨੂੰ ਗੁਰਮੁਖੀ ਕਿਸੇ ਕੀ ਆਈ ਤੁਹਿਆ ਲੱਗ ਪਿੱਛੋਂ ਇਹ ਤਾਂ ਕਾਫੀ ਲੱਗ ਗਿਆ ਪਰ ਇਹ ਸੱਚੀ ਵਡਿਆਈ ਹੈ ਜਿਸ ਨੂੰ ਬਖਸ਼ੇ ਤਿਸ ਦੇ ਆਪ ਲੈ ਮਿਲਾਈਏ ਜਿਸ ਨੂੰ ਬਖਸ਼ੇ ਦੇ ਜਿਹਨੂੰ ਬਖਸ਼ਿਸ਼ ਆਪ ਲੈ ਮਿਲਾਈਆ ਆਪ ਆਪਣੇ ਨਾਲ ਮਿਲਾ ਵੀ ਲੈਂਦੇ ਉਹਨੂੰ ਜਿਹਨੂੰ ਨਾਮ ਦਾ ਰਸ ਦੇ ਦਿੰਦਾ ਕੰਡ ਅੰਤਰ ਅਮਰਤ ਰੱਖਿਓ ਨਾ ਅੰਮ੍ਰਿਤਾਰੇ ਹਿਰਦੇ ਚ ਰੱਖਿਆ ਹੋਇਆ ਉਹਨੇ ਕਿਤੇ ਦੂਰ ਨਹੀਂ ਕੋਈ ਪ੍ਰਾਪਤਤਾ ਕਰਨ ਦੀ ਕੋਸ਼ਿਸ਼ ਕਰੇ ਰੱਖਿਓ ਗੁਰਮੁਖੀ ਕਿਸੇ ਪਿਆਈ ਕਿਸੇ ਗੁਰਮੁਖ ਨੂੰ ਪਹਲਾਉਂਦਾ ਫਰਾ ਦਿੰਦਾ ਹੁੰਦਾ ਉਹਦੇ ਅੰਦਰ ਹੀ ਹੈ ਮਨੁੱਖਤਾ ਅੰਦਰ ਜਾਂਦਾ ਹੀ ਨਹੀਂ ਉਹ ਤਾਂ ਬਾਹਰ ਢੋਲਣੇ ਸੇ ਪਰਮ ਉਹ ਸਾਰੇ ਮਨੁੱਖਤਾ ਬਾਹਰ ਜੁੜੇ ਹੋਏ ਨੇ ਬਾਹਰ ਹੀ ਨੇ ਕਹਿੰਦਾ ਬਾਹਰੋਂ ਜਿਹੜਾ ਚਾਹੀਦੀਆਂ ਨਾਲ ਉਹਨਾਂ ਨੂੰ ਮਾਇਆ ਨਾਲ ਜੁੜੇ ਹੋਏ ਨੇ ਲੋਕ ਜਿਹਨੇ ਬਾਹਰ ਲੈਣੇ ਹੁੰਦੇ ਉਹਦਰ ਦੀ ਗੱਲ ਨਹੀਂ ਕਰਦੇ ਹੁੰਦੇ ਹਾਂਜੀ ਕਟ ਅੰਤਰ ਅੰਮ੍ਰਿਤ ਰੱਖਿਓ ਨ ਗੁਰਮੁਖੀ ਕਿਸੈ ਪਿਆਈ ਪਿਆਈ ਹੈ ਕਿਸੇ ਗੁਰਮੁਖੀ ਨੂੰ ਹੀ ਪਿਆਇਆ ਜਾਂਦਾ ਹੈ ਆ ਪਿਆਈ ਹੈ ਨਹੀਂ ਪਿਆਈ ਕਿਸੇ ਗੁਰਮੁਖੀ ਨੂੰ ਹੀ ਅੰਮ੍ਰਿਤ ਪਿਆਇਆ ਨਾਲ ਫਿਰ ਅਗਲੀ ਉਹ ਵਾ ਵਾ ਸੱਚੇ ਪਾਤਸ਼ਾਹ ਸੱਚੀ ਨਾ ਹੀ ਫਿਰ ਨਾਲ ਕਾਫੀਆਂ ਮਿਲਦਾ ਉਹਦਾ ਹੈ ਜੀ ਹਾਂ ਜੀ ਪੌੜੀ ਚ ਬਖਸ਼ੇ ਦਾ ਜਿਆਦਾ ਜ਼ਿਕਰ ਆਉਂਦਾ ਮਾਨ ਬਾਕੀ ਇਹ ਇਹ ਬਖਸ਼ੇ ਬਖਸ਼ਨਾਤਪਨ ਕਿੰਨੇ ਬਖਸ਼ਿਸ਼ ਕਰਨੀ ਹੈ ਬਖਸ਼ੇ ਉਹ ਹੈ ਜਿੰਨਾ ਜਪਣ ਆਪਣੇ ਵਸਤੇ ਕਰ ਲੈ ਜਿਹੜਾ ਜਪਣ ਤੋਂ ਪਰੇ ਹੈ ਬਖਸ਼ੇ ਇੱਥੇ ਨੌਵੀਂ ਪੌੜੀ ਦੀ ਸਮਾਪਤੀ ਹੈ ਜੀ